ਤੂੰ ਮੈਨੂੰ ਸ਼ਕਤੀ ਦੇ ਮੈਂ ਅੱਕਣਾ ਨਹੀਂ ਚਾਹੁੰਦੀ ਮੈਂ ਥੱਕਣਾ ਨਹੀਂ ਚਾਹੁੰਦੀ ਮੈਂ ਹੰਬੜਾ ਨਹੀਂ ਚਾਹੁੰਦੀ ਤੂੰ ਮੈਨੂੰ ਸ਼ਕਤੀ ਦੇ ਮੇਰੇ ਜਿਸਮ ਦੀਆਂ ਰਗਾਂ 'ਚ ਚੁਸਤੀ ਫੁਰਤੀ ਵਾਲੇ ਖੂਨ ਦਾ ਸੰਚਾਰ ਹੋਵੇ ਤੂੰ ਮੈਨੂੰ ਸ਼ਕਤੀ ਦੇ ਮੇਰੇ ਜਿਸਮ ਦੀਆਂ ਰਗਾਂ 'ਚ ਚੁਸਤੀ ਫੁਰਤੀ ਵਾਲੇ ਖੂਨ ਦਾ ਸੰਚਾਰ ਹੋਵੇ ਮੇਰੇ ਨੈਣ ਤੇਰੇ ਦਰਸ਼ਨ ਕਰਨ ਦੇ ਸਮਰੱਥ ਰਹਿਣ ਮੇਰੇ ਨੈਣ ਤੇਰੇ ਦਰਸ਼ਨ ਕਰਨ ਦੇ ਸਮਰੱਥ ਰਹਿ ਸਕਣ ਮੇਰੇ ਕੰਨ ਮੇਰੇ ਕੰਨ ਤੇਰੇ ਪਵਿੱਤਰ ਮੁਖਾਰਬਿੰਦ ਚੋਂ ਨਿਕਲਦੇ ਬਚਨਾਂ ਨੂੰ ਸਾਂਭ ਸਕਣ ਮੇਰੇ ਹੱਥ ਕਲਮ ਫੜ ਤੇਰੀਆਂ ਸਿਫਤਾਂ ਨੂੰ ਕਾਗਜ਼ਾਂ ਤੇ ਸਚਾ ਸਕਣ ਦੇ ਯੋਗ ਰਹਿਣ ਮੇਰੇ ਹੱਥ ਕਲਮ ਫੜ ਤੇਰੀਆਂ ਸਿਫਤਾਂ ਨੂੰ ਕਾਗਜ਼ਾਂ ਤੇ ਸਮਾ ਸਜਾ ਸਕਣ ਦੇ ਯੋਗ ਰਹਿਣ ਮੇਰਾ ਦਿਮਾਗ ਕਦੇ ਵੀ ਮੇਰਾ ਦਿਮਾਗ ਕਦੇ ਵੀ ਸ਼ਰਧਾ ਨਾਲ ਦੀ ਦਲੀਲ ਨਾ ਪੇਸ਼ ਕਰੇ ਮੇਰੀ ਜੀਬ ਮੇਰੀ ਜੀਬ ਤੇਰੇ ਹੁਕਮਾਂ ਅੱਗੇ ਸਿਰਫ ਸਤਿਵਚਨ ਦਾ ਉਚਾਰਨ ਕਰੇ ਮੇਰੀ ਜੀਬ ਤੇਰੇ ਹੁਕਮਾਂ ਅੱਗੇ ਸਿਰਫ ਸਤਿਵਚਨ ਦਾ ਉਚਾਰਨ ਕਰੇ मेरा मन सदा ही तेरे चरणां च अर्पित रहे मेरा मन सदा ही तेरे चरणां अर्पित रहे मेरी आत्मा मेरी आत्मा सदा तेरी बख्शीश नाल मान माल रहे तू मेनू शक्ति दे तू मेनू शक्ति दे